श्लोक ਮਹਲਾ पहला पौणे पाणी अग्नि जिओ तिनक्या खुशियां क्या, खुशिया, क्या पीड़ धरती पातालनी आकाशी इक दर रहण वजीर आ पौणे पाणी अग्नि जिओ पौणा पाणी ਨੂ ਕੀ ਖੁਸ਼ੀ ਹੋ ਸਹਜਿਆ ਕੀ ਗਮੀ ਕੀ ਇਹਨਾਂ ਨੂੰ ਤਕਲੀਫ ਹੋ ਸਕਦੀ ਹੈ ਜੇ ਬਾਤਵਾ ਨੂੰ ਖੁਸ਼ੀ ਗਮੀ ਹੁੰਦੀ ਹੈ ਜਿਹੜੇ ਤਤ ਨੇ ਜੜ ਵਸਤੂ ਆ ਉਹਨੂੰ ਕੋਈ ਖੁਸ਼ੀ ਨਹੀਂ ਹੁੰਦੀ ਕੋਈ ਉਹਨੂੰ ਪੀੜ ਨਹੀਂ ਕਿਰ ਕਿਹ ਖੁਸ਼ੀਆਂ ਕਾ ਪੀੜ ਧਰਤੀ ਪਤਾਲੀ ਆਕਾਸ਼ੀ ਇੱਕ ਦਾ ਲੈਣ ਵਜ਼ੀਰ ਧਰਤੀ ਦੇ ਵਿੱਚ ਆਕਾਸ਼ ਪਤਾਲ ਹੈਗਾ ਹੀ ਨੇ ਧਰਤੀ ਹੈ ਆਕਾਸ਼ ਹੈ ਪਤਾਲ ਧਰਤੀ ਦਾ ਉੱਤਾਰ ਆਕਾਸ਼ ਹੈ ਧਰਤੀ ਦੇ ਥੱਲੇ ਨੂੰ ਪਤਾਲ ਹੈ ਇਕਦਾਂ ਰਾਣ ਵਜ਼ੀਰ ਇਹ ਇੱਕ ਜਗ੍ਹਾ ਸਮਝੋ ਸਾਡੇ ਰਾਜਾ ਇਹਨਾਂ ਚ ਕੋਈ ਵੀ ਨਹੀਂ ਹੈ ਵਜ਼ੀਰ ਇਸ ਕਰਕੇ ਨਾ ਹੁਕਮ ਦੇ ਵਿੱਚ ਜਿਹੜੇ ਚੱਲੇ ਵਜ਼ੀਰ ਹੁੰਦਾ ਪਾਂਛਾ ਤਾਂ ਪਰਮੇਸ਼ਰ ਹੈ ਇਹ ਉਹਦੇ ਹੁਕਮ ਚ ਰਹਿਣ ਕਰਕੇ ਹੁਕਮ ਚ ਰਹਿ ਕੇ ਕੁਝ ਕੰਮ ਕਰਦੇ ਨੇ ਕੰਮ ਦਿੰਦੇ ਨੇ ਇਸ ਕਰਕੇ ਉਹਦੇ ਹੀ ਚੱਲਦੇ ਨੇ ਵਜ਼ੀਰ ਉਹਦੇ ਹੀ ਨਾਲ ਹੁੰਦਾ ਹਾਂਜੀ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜ਼ਹੀਰ ਇੱਕ ਦੇ ਖਾਹੇ ਨਿਖੁੱਟੇ ਨਾਹੀ ਇੱਕ ਸਦਾ ਫਿਰੈ ਫਕੀਰ ਇੱਕ ਨਾ ਦੀ ਵੱਡੀ ਆਰਜਾ ਅੱਜ ਵੀ ਬਹੁਤ ਲੰਬੀ ਆਰਜਾ ਇੱਕ ਮਰ ਹੋਏ ਜ਼ਹੀਰ ਇੱਕ ਮਰ ਕੇ ਮਿੱਟੀ ਬਣ ਜਾਂਦੇ ਨੇ ਆ ਮੰਡੀ ਬਣ ਜਾਂਦੇ ਨੇ ਇੱਕ ਦੇ ਖਾਹੇ ਨਿਖੁੱਟੇ ਨਾਹੀ ਇੱਕ ਐਸੇ ਨੇ ਜਿਹੜੇ ਐਸਾ ਗਿਆਨ ਪ੍ਰਾਪਤ ਕਰਦੇ ਨੇ ਕਿ ਆਪ ਵੀ ਖਾਂਦੇ ਨੇ ਔਰ ਉਹਨਾਂ ਦਾ ਗਿਆਨ ਨਿਖੁੱਟਦਾ ਨਹੀਂ ਘਟਦਾ ਨਹੀਂ ਖੋਟਾ ਨਹੀਂ ਹੁੰਦਾ ਇਹ ਖੁੱਟਦਾ ਨਹੀਂ ਇੱਕ ਸਦਾ ਫਿਰੇ ਫਕੀਰ ਇਹ ਕੈਸੇ ਨੇ ਫਕੀਰ ਨੇ ਸਦਾ ਫਿਰਦਾ ਹੀ ਰਹਿੰਦੇ ਨੇ ਘੁੰਮਦੇ ਫਿਰਦੇ ਰਹਿੰਦੇ ਨੇ ਨਾ ਕੁਝ ਉਹ ਖਾਂਦੇ ਨੇ ਨਾ ਕੁਝ ਖਾਂਦੇ ਨੇ ਜਿਹੜਾ ਨਾ ਕੁਝ ਖੱਟੇ ਬਹੁਤਾ ਨਾ ਕੁਝ ਖੋਵੇ ਫਕੀਰ ਹੈ ਠੀਕ ਹੈ ਜਿਹੜੇ ਦੇ ਕੇ ਖਾਣ ਵਾਲਿਆਂ ਜਿਹੜੇ ਇੱਕ ਦਿਨ ਖਾਏ ਕੋਲ ਧਨ ਕਾਫੀ ਘੱਟ ਹੈ ਇਸ ਗੱਲ ਹਾਂ ਉਹ ਤਾਂ ਵਿਚਾਰੇ ਰੋਟੀ ਤੱਕ ਆ ਉਹ ਜਾਲੀ ਲਾਲਚੀ ਹੈ ਦੀ ਦੇਣ ਨੂੰ ਵੀ ਕੁਛ ਹੈ ਦੀ ਇੱਕ ਨਾਮਤਾਂ ਨਾਲ ਇਹ ਨੇ ਉਹ ਜਿਹੜੇ ਨਖੁੱਟੇ ਨਹੀਂ ਨਾਮਤਾਂ ਨਾਲ ਇਹ ਨੇ ਨਹੀਂ ਫਿਰ ਇਹ ਤਾਂ ਪੁੱਠੀ ਗੱਲ ਹੋ ਗਈ ਨਾਮ ਫਕੀਰ ਕੋਲ ਨਾਮਤਾਂ ਹੋ ਤਨ ਹੁੰਦਾ ਕਹ ਫਕੀਰ ਕੋਲ ਨਾਮਤਾਂ ਨਹੀਂ ਹੁੰਦਾ ਜਾਂਤਾ ਹੁੰਦਾ ਉਤਲਾ ਨਾਮ ਨਹੀਂ ਹੁੰਦਾ ਉਹ ਛੋੜੀ ਕੀ ਹੀਰ ਸਦਾ ਫਿਰੇ ਫਕੀਰ ਇੱਕ ਫਕੀਰ ਫਿਰਦੇ ਨੇ ਲੈਣ ਵਾਸਤੇ ਲੋਭ ਕਿਤੋਂ ਢੋਲਦੇ ਇਕੱਜ ਖਾਂਦੇ ਨੇ ਔਰ ਖਰਚਦੇ ਨੇ ਉਪਦੇਸ਼ ਦਿੰਦੇ ਨੇ ਮੁਕਦਾ ਹੀ ਨਹੀਂ ਉਹਨਾਂ ਕੋਲੋਂ ਜਿਹੜੇ ਉਹਨਾਂ ਕੋਲ ਤੁਰਦੇ ਫਿਰਦੇ ਨੇ ਲੈਣ ਵਾਲੇ ਉਹ ਫਕੀਰ ਨੇ ਉਹਨਾਂ ਕੋਲ ਜਾਣਦੇ ਨੇ ਬਹੁਤਾ ਉਹਨਾਂ ਦੇ ਸਮਝ ਵੀ ਨਹੀਂ ਆਉਂਦਾ ਹੈ ਅੱਗੇ ਨਹੀਂ ਤੁਰਦੇ ਬਹੁਤਾ ਉਹ ਤਾਂ ਥੋੜੀ ਹੁੰਦੀ ਆ ਉਹਨਾਂ ਦੀ ਫਕੀਰਾਂ ਦੀ ਅੱਛਾ ਜੀ ਇਹ ਫਿਰ ਜਿਹੜੇ ਪਿਛਲੇ ਸੀਕਰਾਂ ਵੱਡੀ ਹਾਰਜਾ ਇਹ ਫਿਰ ਉਹਨਾਂ ਚੋਂ ਹੀ ਆ ਜਿਹਨਾਂ ਕੋਲ ਨਿਖੁੱਟੇ ਨਹੀਂ ਦੀ ਵੱਡੀ ਹਾਰਜਾ ਨਾ ਨਾ ਨਾ ਉਹ ਕਰਦੇ ਨੇ ਚਾਰੇ ਜੁਗ ਦੀ ਹਾਰਜਾ ਓਏ ਦੀ ਉਹ ਹੈਗੇ ਨੇ ਜੱਤੀ ਜੱਤੀ ਕਹੋਂਦੇ ਨੇ ਜਿਵੇਂ ਇਹਦੇ ਨਾਲ ਨਾਲ ਆਈ ਹੋਈ ਹੈ ਗੱਲ ਫਰਮਾਨ ਆਈ ਹੋਈ ਹੈ ਗੱਲ ਪੈਰੋਂ ਆਈ ਹੋਈ ਹੈ ਗੱਲ ਕੋਈ ਉਹ ਮਰੇ ਹੀ ਨਹੀਂ ਜੀ ਹਾਂ ਸਾਥ ਜਾਨੇ ਉਹ ਜਾਨ ਪਾਲੇ ਇਸ਼ਾਰੇ ਦੇ ਅੱਛਾ ਪਰ ਸ੍ਰਿਸ਼ਟੀ ਵਿੱਚ ਵੀ ਕੁਝ ਦੀ ਆਯੂ ਕਾਫੀ ਜ਼ਿਆਦਾ ਹੈ ਕੁਝ ਜੀਵਾਂ ਦੀ ਘੱਟ ਹੈ ਇਸ ਤਰ੍ਹਾਂ ਵੀ ਗੱਲ ਹਾਂ ਇਸ ਤਰ੍ਹਾਂ ਵੀ ਗੱਲ ਹੈ ਜਿਵੇਂ ਦਰਖਤਾਂ ਦੇ ਵਿੱਚ ਕਈ ਦਰਖਤਾਂ ਦੀ ਉਮਰ ਕਈ ਕਈ 100 ਸਾਲ ਦੀ ਹੁੰਦੀ ਹੈ ਪੌਂ ਉਮਰ ਕਹਿੰਦੇ ਬਹੁਤ ਵੱਡੀ ਹੁੰਦੀ ਹੈ अच्छा इस ਹਾਂ ਕਾਫੀ काफी ਦੀ ਉਮਰ ਕਾਫੀ ਐ ਕੁਛ ਦੀ ਹਾਂ ਮੱਖੀਆਂ ਹੋਇਆ ਇਹਨਾਂ ਦੀ ਬਹੁਤ ਘਟ ਹੁੰਦੀ ਹੈ ਹਾਂ ਮਛਰ ਹੋਇਆ ਬਕੀ ਹੋ ਗਿਆ ਉਮਰ ਘਟ ਹੁੰਦੀ ਹੈ ਹਾਂ ਕੀੜੀਆਂ ਹੋਈਆਂ ਜਿਵੇਂ ਹਾਂਜੀ ਹਾਂ ਅੱਛਾ ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਹਕਮ ਸਾਜੇ ਹੁਕਮ ਨਾਲ ਸਾਰਿਆਂ ਨੂੰ ਸਾਜਦਾ ਸਰੀਰ ਨਾਲ ਜੋੜਦਾ ਆਤਮਾ ਨੂੰ ਸਾਜਣਾ ਹੁਕਮ ਹੀ ਟਾਹੇ ਹੁਕਮ ਨਾਲ ਹੀ ਅਲੱਗ ਕਰ ਦਿੰਦਾ ਹੈ ਸਰੀਰ ਤੋਂ ਮਾਇਆ ਤੋਂ ਆਤਮਾ ਨੂੰ ਇੱਕ ਚਸੇ ਲੱਖ ਇੱਕ ਸਤਲਿ ਦੀ ਲੱਖਾਂ ਹੀ ਜੀਵ ਇਕੱਠੇ ਹੀ ਕਰ ਦਿੰਦਾ ਸਭ ਕੋ ਨੱਥਾ ਹੈ ਸਾਰਿਆਂ ਦੇ ਨੱਥ ਪਾ ਕੇ ਰੱਖਦਾ ਹੈ ਸਾਰਿਆਂ ਨੂੰ ਆਪਣੇ ਹੁਕਮ 'ਚ ਰੱਖਦਾ ਹੈ ਬਖਸ਼ੇ ਨੱਥਿਆਂ ਨੂੰ ਬਖਸ਼ ਵੀ ਦਿੰਦਾ ਛੱਡ ਵੀ ਦਿੰਦਾ ਜਿਹੜੇ ਮੁਕਤ ਹੋ ਜਾਂਦੇ ਨੇ ਉਹ ਰੱਥੇ ਬਖਸ਼ੇ ਜਾਂਦੇ ਨੇ ਸੱਤਿਆ ਹੋਇਆ ਦੇ ਵੀ ਸਰੀਰ ਦੇ ਵਿੱਚ ਜਲ ਨਹੀਂ ਰਹਿੰਦਾ ਸਰੀਰ ਫਿਰ ਵੀ ਨੱਥ ਪਾ ਕੇ ਰੱਖਦਾ ਆਤਮਾ ਖੁੱਲੀ ਫਿਰ ਵੀ ਨਹੀਂ ਹੈ ਸਰੀਰ ਤੋਂ ਬਾਅਦ ਵੀ ਹਾਂ ਇੱਥੇ ਅੱਗੇ ਤਾਂ ਬਖਸ਼ੇ ਤੋੜੇ ਨੱਥ ਉਹ ਜੇ ਬਖਸ਼ੇ ਨੇ ਤਾਂ ਤੋੜਦੇ ਨੱਥ ਜਿਨ੍ਹਾਂ ਜੇ ਬਖਸ਼ੇ ਜਿੱਦੀਆਂ ਉਹਨਾਂ ਨੱਥੇ ਹੋਈ ਨੇ ਜਾਂ ਸਰੀਰ ਹੈ ਜਾਂ ਨਹੀਂ ਹੈ ਅੱਛਾ ਜੱਥਾ ਹੀ ਉਹ ਮਸੂਕ ਸਾਗਰ ਚ ਨਹੀਂ ਜਾਂਦੇ ਜੱਥਾ ਹੀ ਨੱਥੇ ਹੋਏ ਹੈ ਜੀ ਹਾਂ ਜੱਥੇ ਨੱਥੇ ਹੋਏ ਨੇ ਕੀ ਗੱਸਾ ਜੋਨੀ ਆਗਾ ਕੋਈ ਪੂਤ ਵਾਂਗਿਆ ਬਰੋਟੇ ਤੇ ਰਹਿੰਦਾ ਸਾਡੇ ਮੌਜਨਾ ਆਪਣੀ ਮਰਜ਼ੀ ਦੇ ਅੱਛਾ ਸਭ ਕੋ ਨੱਥੇ ਨੱਥਿਆਂ ਬਖਸ਼ੇ ਤੋੜੇ ਨੱਥ ਵਰਨਾ ਚਿਹਨਾ ਬਾਹਰਾ ਲਿਖੇ ਬਾਜ ਅਲਖ ਆ ਵਰਨਾ ਜਿਹਨਾਂ ਤੋਂ ਬਾਹਰ ਹੈ ਜਿਹੜੇ ਚਾਰ ਵੰਡ ਵੰਡ ਕੀਤੀ ਹੈ ਪੰਡਤ ਨੇ ਉਹਦੇ ਪਰੇ ਆਹੋ ਆਤਮਾ ਸਰੀਰਾਂ ਤੋਂ ਬਾਹਰ ਹੈ ਇਸ ਕਰਕੇ ਆਤਮਾ ਨੂੰ ਪਵਿੱਤਰ ਪਵਿੱਤਰ ਆਤਮਾ ਨਾਲ ਜਿਹੜਾ ਜੋੜਤਾ ਹੈ ਤਾਂ ਬੇਕੂਫੀ ਸੀਗਾ ਉਹਦੀ ਗੱਲ ਸੀ ਬੜਨ ਚੰਨਾ ਤੋਂ ਬਾਹਰ ਹੀ ਰਹਿੰਦਾ ਹੈ ਇਹ ਆਤਮਾ ਆਤਮਾ ਕਦੇ ਘੋੜਾ ਕਦੇ ਗਦਾ ਕਦੇ ਕੁਛ ਕਦੇ ਕੁਛ ਇਹਦਾ ਵਰਣਨ ਕਰਦਾ ਲੇਖੇ ਬਾਝ ਅਲਖ ਜੇ ਲੇਖਾ ਛੱਡ ਦੇ ਫਿਰ ਇਹ ਅਲਖ ਹੈ ਅਸਲ 'ਚ ਲੇਖੇ ਬਾਝ ਇਹ ਅਲਖ ਇਹ ਮੰਨਦਾ ਇਹ ਲੇਖਾ ਲੇਖਾ ਨਹੀਂ ਹੈ ਦਾ ਕੋਈ ਦੇਖਾ ਇਹਦਾ ਗੜਾ ਹੁਕਮ ਚੱਲਦਾ ਵਿਚਾਰੇ ਦਾ ਇਹ ਤਾਂ ਐਵੇਂ ਮੰਨ ਲੈਂਦਾ ਹੈ ਦੇਖਾ ਪੁੱਤ ਪਾਉ ਮੰਨ ਲੈਂਦਾ ਪੁੱਤ ਪਾਵੇ ਦਾ ਹੈ ਕੋਈ ਹਾਂਜੀ ਇਹ ਦੀ ਗੱਲ ਹੈ ਜੀ ਹਾਂ ਦੀ ਹਾਂਜੀ ਕਿਉਂ ਕਥੀਐ ਕਿਉਂ ਆਖੀਐ ਜਪੈ ਸਚੁ ਸੱਚ ਕਰਣਾ ਕਥਣਾ ਕਰ ਸਭ ਨਾਨਕ ਆਪ ਅਕਥ ਕਿਉਂ ਕਥੀਐ ਕਿਉਂ ਆਖੀਐ ਕਿਵੇਂ ਕਥਤ ਕਰੀਏ ਕਿਉਂ ਕਹਿ ਲਈਏ ਇਹਨੂੰ ਪਾਪੀ ਹੈ ਅਪਰਾਧੀ ਹੈ ਫਲਾਨਾ ਕੰਮ ਕਰ ਕਿਉਂ ਆਖੀਆ ਕਿਉਂਕਿ ਇਹ ਜੱਪੇ ਸੱਚਾ ਸੱਚ ਸਭ ਕੋ ਸੱਚਾ ਸੱਚ ਜੱਪਦਾ ਜਦ ਜਕਰਉਣ ਦਾ ਨਖ ਤੋੜ ਦਿੰਦਾ ਉਹ ਤਾਂ ਹੈ ਉਤਲੀ ਗੱਲ ਸੱਚੀ ਬਾਕੀ ਗੱਲਾਂ ਸਭ ਝੂਠੀਆਂ ਕਰਨਾ ਕਥਨਾ ਕਰ ਸਭ ਨਾਨਕ ਆਪ ਇਕੱਠ ਆ ਜਿਹੜਾ ਕਰਨਾ ਕਥਨਾ ਗ੍ਰੰਥ ਥਲੇ ਲਿਖਿਆ ਮਾਰਿਆ ਨਾ ਪੜਤਾਨੇ ਇਹਦਾ ਕੰਮ ਲੱਗੇ ਹੋਏ ਤੇ ਵਿਹਲੇ ਇਹ ਵਿਹਲੇ ਕੰਮ ਲੱਗੇ ਰਹੈ ਨੇ ਐਵੇਂ ਫਜ਼ੂਲ ਕਰਨਾ ਕੱਟਣਾ ਕਾਰ ਸਭ ਸਮਾਧੀ ਲਾਉਂਦਾ ਕੋਈ ਇਹ ਕਰਨਾ ਹੋ ਗਿਆ ਕੱਟਣਾ ਹੋ ਗਿਆ ਜਿਹੜੇ ਆ ਪ੍ਰਚਾਰਕ ਪ੍ਰਚਾਰ ਕਰਦੇ ਨੇ ਕਿਤਾਬਾਂ ਗ੍ਰੰਥ ਲਿਖਦੇ ਨੇ ਨਾਨਕ ਆਪ ਨਾਨਕ ਕਹਿੰਦਾ ਉਹ ਤਾਂ ਇਕੱਠ ਹੈ ਉਹਦੇ ਬਾਰੇ ਨਾ ਕੁਝ ਲਿਖਿਆ ਜਾ ਸਕਦਾ ਨਾ ਕੁਝ ਬੋਲਿਆ ਜਾ ਸਕਦਾ ਇਹ ਜੀਵ ਤਾਂ ਇਕੱਠ ਹੈ ਇਹਦੀ ਇਕੱਠ ਕੀ ਕਥਾ ਹੈ ਇਕੱਠ ਕੀ ਕਥਾ ਨਰਾਲੀ ਰੋਜੀ ਇਕੱਠੀ ਕਥਾ ਸੁਣੇਈ ਰਿੱద్ధి ਬੁੱద్ధి ਸਿੱਧ ਗਿਆਨ ਸਦਾ ਸੁਖ ਹੋਈ ਏ ਕਾ ਇਕੱਠੀ ਕਥਾ ਕੋਈ ਸੁਣ ਲਵੇ ਜੇ ਗੁਰਬਾਣੀ ਕੋਈ ਸੁਣ ਲਵੇ ਮੇਰਾ ਖਿਆਲ ਸੁਣੀ ਹੁੰਦੀਆਂ ਜੋ ਕਿਸੇ ਨੇ ਗੁਰਬਾਣੀ ਦਾ ਮੰਦੀ ਦੀ ਸੁਣੀ ਹੋਈ ਜੇ ਸੁਣ ਜਾਂਦੀ ਗੁਰਬਾਣੀ ਦੀ ਕਥਾ ਕੋਈ ਸੁਣ ਲਵੇ ਸੁਣੇਈ ਰਿੱਧ ਬੁੱਧ ਰਿੱద్ధి ਬੁੱద్ధి ਕਿੰਨੇ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਿੱਦਿ ਸੰਸਾਰੀ ਗਿਆਨ ਤੇ ਨਿਰਾਕਾਰੀ ਗਿਆਨ ਬੁੱਧੀ ਦੋਹੇ ਪ੍ਰਾਪਤ ਕਰ ਲੈਂਦੀ ਬੁੱਧੀ ਹਿੱਦਿ ਔਰ ਸਿੱਧੀ ਦੋਹੇ ਪ੍ਰਾਪਤ ਕਰ ਲੈਂਦੀ ਹੈ ਬੁੱਧ ਪ੍ਰਗਟ ਹੋ ਜਾਂਦੀ ਹੈ ਵਿਵੇਕ ਬੁੱਧ ਪ੍ਰਗਟ ਹੋ ਜਾਂਦੀ ਹੈ ਹਿੱਦਿ ਔਰ ਸਿੱਧੀ ਵਾਲੀ ਜਿਹੜੀ ਬੁੱਧ ਆ ਬਿਵੇਕ ਬੁੱਧ ਹੁੰਦੀ ਹੈ ਔਰ ਗਿਆਨ ਜਿਹਨੇ ਲੋਕ ਦਾ ਗਿਆਨ ਸਦਾ ਸੁਖ ਹੋਈ ਔਰ ਸਦਾ ਹੀ ਸੁਖ ਹੋ ਜਾਂਦਾ ਇਹ ਪ੍ਰਾਪਤੀ ਆਪ੍ਰਾਪਤੀ ਨਾਲ ਸਦਾ ਸੁਖ ਹੋ ਜਾਂਦਾ ਜੀ की ਕੀ जी? ਜੀ संसारी माया ਵਾਇਆ ਪਦਾਰਥ ਇਹ ਇੱਛਾ ਹੀ ਨਹੀਂ ਰਹਦੀ ਤੇ ਸਿੱਧੀ ਸਿੱਧੀ ਸਮਝ ਅੱਛਾ ਜੀ ਤੇ ਪ੍ਰਚੰਡ ਗਿਆਨ ਦੇ ਨਾਲ ਸਦਾ ਸੁਖ ਕਹਿੰਦ ਭਾਵ ਸੁਖ ਸਾਗਰ ਚ ਨਿਵਾਸ ਹੋ ਜਾਂਦਾ ਹੈ ਜੀ ਹਾਂ ਜੀ ਹਾਂ ਪੂਜ ਪ੍ਰਾਣ ਹੋਵੇ ਥਿਰ ਕੰਧ ਅਜਰ ਜਰਾ ਜਿਹੜਾ ਹੁਕਮ ਹੈ ਇਹ ਹੁਕਮ ਨੂੰ ਬੜਾ ਜਲਦੀ ਸਨਦਾ ਹਾਂ ਅਜਰ ਹੈ ਅਜਰ ਹੁਕਮੇ ਸੱਚ ਹੁੰਦਾ ਸੱਚ ਨੂੰ ਜਲਦਾ ਨਹੀਂ ਸੱਚ ਸੁਣ ਕੇ ਮੁਸ਼ਕਲ ਹੈ ਸੱਚ ਸੁਣਨਾ ਇਹਦਾ ਬੱਚੇ ਦੇ ਖਿਲਾਫ ਹੈ ਨਾ ਸੱਚੀ ਗੱਲ ਖਿਲਾਫ ਆ ਆਦਮੀ ਮੁਸ਼ਕਲ ਹੈ ਸੱਚ ਸੁਣਨਾ ਕੌੜਾ ਲੱਗਦਾ ਜੇ ਸੱਚ ਨੂੰ ਜਲ ਲਵੇ ਸੁਣ ਲਵੇ ਤੇਰੇ ਆ ਨੌ ਕੋਲ ਬੰਦ ਜਿਹੜੀਆਂ ਅੱਗਲੀਆਂ ਕੋਲਾਂ ਨੇ ਨਾ ਸਾਰੀਆਂ ਹੀ ਨਾਮ ਆਪਣਾ ਨਾਮ ਜਿਹੜਾ ਕੋਲ ਦਾ ਨਾਮ ਰੱਖਿਆ ਜਾਂਦਾ ਨਾ ਨਾ ਕੋਈ ਨਾ ਉਹ ਨਾ ਕੋਈ ਥਾਂ ਨਾ ਕੋਈ ਕੋਲਾ ਫਿਰ ਇਹ ਪਛੜੀ ਫਿਰ ਆਤਮਾ ਯਾਤਮਾ ਰਹਿ ਜਾਂਦੀ ਅੱਗੇ ਜਨਮ ਮੌਲ ਛੁੱਟ ਜਾਂਦਾ ਕਹਿਣ ਦਾ ਮਤਲਬ ਹੈ ਆਹ ਜੀ ਨੌ ਦਾ ਮਤਲਬ ਇੱਥੇ 9 9 ਕੰ ਨਾਉ ਨਾਮ ਹੈ ਨੇਮ ਕੁਲ ਦੇ ਨਾਲ ਨਾਉ ਜੁੜ ਜਾਂਦਾ ਨਾ ਦਾਦਾ ਕੋੜਾ ਅੱਛਾ ਜਾਂਦਾ ਨਾ ਕੋਲ ਕੁਲ ਦੇ ਨਾਲ ਨਾਉ ਜੁੜਦਾ ਹੀ ਹੁੰਦਾ ਦਿਮਲ ਹੈ ਇੱਕ ਲੈ ਬਿਲਕੁਲ ਜਿਹੜੀ ਹੈ ਭਗਤਾਂ ਦੀ ਉਹ ਤਾਂ ਰਹਿੰਦੀ ਹੈ ਸਾਰੀ ਕੁਲਾਂ ਦੀ ਨਹੀਂ ਠੀਕ ਹੈ ਜੀ ਪੂਜੇ ਪ੍ਰਾਣ ਹੋਵੇ ਥਿਰ ਕੰਧ ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਜੇ ਆਪਣੇ ਆਪ ਆ ਉਹ ਆਪਣੇ ਮੂਲ ਨੂੰ ਪੁੱਛਦਾ ਉਹਦੇ ਉੱਤੇ ਪੂਛੜ ਆਉਂਦਾ ਸੰਤਬਨ ਹਰਪ ਦਾ ਉਹਦੇ ਅੱਗੇ ਪਰ ਫੇਰ ਕਹਿੰਦੇ ਵੀ ਫਿਰ है, ਕਿ ਨਿਰਾਕਾਰੀ ਜਿਹੜਾ ਸਰੀਰ ਹੈ ਉੱਥੇ ਰੋ ਜਾਂਦਾ ਆ ਜਿਹੜੀ ਬਾਹਰਲਾ ਸਰੀਰ ਹੈ ਇਹ ਨਹੀਂ ਇਹਦੀ ਫਿਰ ਗਾਣੂ ਜਨਮ ਨਹੀਂ ਹੁੰਦਾ ਹਾਂਜੀ ਕਹਾਂ ਤੇ ਆਇਆ ਕਹਾਂ ਇਹ ਜਾਨ ਜੀਵਤ ਇਹ ਗੱਲਾਂ ਆਪਾਂ ਕਰਦੇ ਆਂ ਜਾਣਾ ਉਹਨਾਂ ਦੀ ਨਾ ਇਹਨਾਂ ਜਾਣਾ ਕਿਤੇ ਨਾ ਹੁਣ ਜੀਵਤ ਮਰਤ ਰਹਾ ਹੈ ਪਰਵਾਣ ਜੇ ਜਿਉਂਦਾ ਹੀ ਆਪਣੇ ਆਪ ਨੂੰ ਮਰਿਆ ਹੋਇਆ ਬੰਦ ਕੇ ਰਹੇ ਜੀਵਨ ਰੁੱਖਾ ਜੀਵਨ ਦੇ ਵਿੱਚ ਹੀ ਮਰਿਆ ਹੋਇਆ ਮਰਿਆ ਹੈ ਜਦ ਹੈ ਜਦ ਕਿਸੇ ਚੀਜ਼ ਤੇ ਕਬਜ਼ਾ ਹੀ ਨਹੀਂ ਕੁਛ ਇਹਦਾ ਹੈ ਹੀ ਨਹੀਂ ਸ਼ਰੀਰ ਵੀ ਇਹਦਾ ਹੈ ਨਹੀਂ ਸਭ ਕਾਸਨ ਨੂੰ ਛੋੜ ਕੇ ਆਪਣੇ ਮੂਲ ਨਾਲ ਜੋੜ ਲੈ ਕੁੱਪਲੇ ਸੰਗ ਜੋੜ ਅਵਰ ਸੰਗ ਤੋੜੀ ਜਾਦਾ ਫਿਰ ਮਰ ਗਿਆ ਹੈ ਜੀ ਹੁੰਦਾ ਹੀ ਫਿਰ ਪ੍ਰਵਾਨ ਹੈ ਐਸਾ ਮੰਨ ਲਾ ਇਹਦਾ ਪ੍ਰਵਾਨ ਹੈ ਹੋ ਜੀ ਹੁਕਮে ਬੁੱਝੈ ਇਹ ਪ੍ਰਸਾਦ ਗੁਰੂ ਤੇ ਜਾਣੈ ਇੱਥੇ ਆ ਕੇ ਹੁਕਮ ਬੁੱਝਦਾ ਹੈ ਬਾਣੀ ਹੁਣ ਹੁਕਮ ਦੇ ਵਿੱਚ ਚੱਲਦਾ ਨਾ ਆਪਣਾ ਹੁਕਮ ਤੇ ਆ ਕੇ ਬਾਣੀ ਚ ਆ ਗਿਆ ਹੁਕਮ ਜਾ ਗਿਆ ਹੁਕਮ ਨੇ ਬੁੱਝਿਆ ਫਿਰ ਹੁਕਮ ਬੁੱਝਦਾ ਕੋਕਾਂ ਮਾ ਪੂਜਿਆ ਤੱਤ ਪਛਾਣੇ ਤੇ ਤੱਤ ਪਛਾਣ ਲੈਂਦਾ ਜਿਉਂਦਾ ਮਰਿਆ ਹੋਇਆ ਹੀ ਹੁਕਮ ਬੁੱਝਦਾ ਹੈ ਜਦੋਂ ਹੀ ਤੱਤ ਪਛਾਣਦਾ ਹੈ ਉਸ ਤੋਂ ਪਹਿਲਾਂ ਨਾ ਹੋਗਾ ਬੁੱਝੇ ਨਾ ਤੱਤ ਪਛਾਣੇ ਮਰਦਾ ਕਹਾਨੂੰ ਅਸਲ ਜਾਗਦਾ ਹੈ ਪਹਿਲਾਂ ਸੁਪਨਾ ਫਿਰ ਜਾਗਦਾ ਜਾਗ ਕੇ ਹੀ ਪਛਾਣਦਾ ਤੱਤ ਨੂੰ ਜਾਗ ਕੇ ਹੀ ਹੁਕਮ ਬੁੱਝਦਾ ਗੁਰ ਇਹ ਪ੍ਰਸਾਦ ਗੁਰੂ ਤੇ ਜਾਣੇ ਇਹ ਜਿਹੜੀ ਕਿਰਪਾ ਹੈ ਪ੍ਰਸਾਦ ਕਿਰਪਾ ਹੀ ਹੁੰਦੀ ਹੈ ਇਹ ਗਿਆਨ ਹੈ ਗਿਆਨ ਦਾ ਪ੍ਰਸਾਦ ਕਹਿ ਲੋ ਗੁਰੂ ਤੋਂ ਜਾਣਦਾ ਸਿੱਧਾ ਗੁਰੂ ਤੋਂ ਡਾਇਰੈਕਟ ਸ਼ਬਦ ਗੁਰੂ ਤੋਂ ਗੁਰਬਾਣੀ ਤੋਂ ਨਹੀਂ ਜਾਣ ਸਕਦਾ ਇਹ ਫਿਰ ਗੁਰੂ ਤੋਂ ਸਿੱਧਾ ਡਾਇਰੈਕਟ ਜਾਣਦਾ ਤੁਰਕੀ ਬਾਣੀ ਤੋਂ ਸ਼ਬਦ ਗੁਰੂ ਤੋਂ ਹੀ ਜਾਣ ਸਕਦਾ ਵੀ ਜਦੋਂ ਹੁਕਮ ਬੁੱਝ ਲਿਆ ਫੇਰ ਇਹਦਾ ਸਿੱਧਾ ਹੁਕਮ ਨਾਲ ਕੰਟੈਕਟ ਹੋ ਜਾਂਦਾ ਹੈ ਜੀ ਹਾਂ ਫਿਰ ਹੁਕਮ ਨਾਲ ਕੰਟੈਕਟ ਜਦੋਂ ਬੁੱਝ ਲਿਆ ਹੁਕਮ ਨਾਲ ਭੁਜਉਂਦਾ ਹੈ ਨਾ ਵੀ ਹੁਕਮ ਸੁਝਣਾ ਪਰ ਜਦ ਹੁਕਮ ਸੁਣਦਾ ਫਿਰ 부ਝ ਲੈਂਦਾ ਵੀ ਆਏ ਬਾਣੀ ਇੱਕ ਵਾ ਇਕਾਗਰ ਹੋਣ ਨੂੰ ਕਹਿੰਦੀ ਹੈ ਨਾ ਕਿ ਹੁਕਮ ਨੂੰ 부ਝ ਲੈਂਦਾ ਫਿਰ ਤੱਤ ਪਛਾਣ ਲੈਂਦਾ ਆਪਣਾ ਆਪਾ ਪਛਾਣ ਲੈਂਦਾ ਤੱਤ ਵਿੱਚੋਂ ਹੀ ਹੁਕਮ ਪੈਦਾ ਹੁੰਦਾ ਤੱਤ ਵਿੱਚੋਂ ਹੀ ਹੁਕਮ ਪੈਦਾ ਹੁੰਦਾ ਤੱਤ ਦਾ ਹੁਕਮ ਦੋ ਨਹੀਂ ਹੈਗੇ ਤੱਤ ਪਛਾਣਾ ਹੈ ਪ੍ਰਸਾਦ ਗੁਰੂ ਤੇ ਜਾਣਾ ਸ਼ਬਦ ਗੁਰੂ ਤੋਂ ਹੀ ਇਹ ਪ੍ਰਸਾਦ ਇਹਨੂੰ ਮਿਲਦਾ ਹੋ ਜਾਂਦਾ ਫੜੀ ਅਗ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਣ ਨਾਨਕ ਇਹ ਜਾਣ ਲੈ ਜਿੰਨਾ ਜਿਹੜੇ ਵੀ ਹੋਂਦ ਆਪਣੀ ਮੰਨਦਾ ਉਹਨਾਂ ਜਿਹੜੇ ਨੱਥ ਪਈ ਰਹਿੰਦੀ ਹੈ ਇਹਦੇ ਜਦ ਵਾਣਾ ਆਪਣਾ ਆਪਾ ਮਿਟਾ ਦਿੰਦਾ ਫੇਰ ਸਮਝ ਲਓ ਇਹਦਾ ਸਲਾਸੀ ਹੁੰਦੀ ਹੈ ਹੁੰਦਾ ਜਿੰਨਾ ਜਿਹੜੇ ਹੁੰਦਾ ਹੈ ਨਾ ਤੇ ਆਪਰੰਪਰ ਹੁੰਦਾ ਆ ਜਿੰਨਾ ਜਿਹੜੇ ਆਪਣਾ ਵਜੂਦ ਰੱਖਦਾ ਵਾਣਾ ਵਖਰਾ ਉਹ ਨਾ ਚਰ ਫੜਿਆ ਹੋਇਆ ਹੈ ਗਰਸਿਆ ਹੋਇਆ ਨਤ ਪਈ ਹੋਈ ਹੈ ਨਾ ਹਾਂ ਨਾ ਮੈਂ ਜੁਦੀਵ ਪਾਣ ਜਦ ਹਮਾਰ ਮੈਂ ਨਹੀਂ ਰਹਿੰਦੀ ਫਿਰ ਜੁਦੀਵ ਨਹੀਂ ਰਹਿੰਦੀ ਹਾਂ আর ਮੈਂ ਦੋਹਾਂ ਨੂੰ ਜੁਦੀ ਨਹੀਂ ਫਿਰ ਪਾਇਆ ਜਾਂਦਾ ਜੇ ਇਹਦਾ ਵਜੂਦ ਜਦ ਉਹ ਇਹ ਆਪਣਾ ਆਪਾ ਫਟਾ ਦਿੰਦਾ ਵੀ ਵਿਚ ਆਇਆ ਸੀ ਮਾਇਆ ਨੂੰ ਲੱਗੀ ਸੀ ਆਕੇ ਨਾ ਹਾਂ ਨਾ ਮੈਂ ਤੇ ਜੇ ਫੜਿਆ ਕਿਦਾ ਕੀ ਭਾਵੇਂ ਵੀ ਫੜਿਆ ਹੋਇਆ ਇਹ ਔਰ ਨਾ ਜਿਹੜੇ ਫਸਿਆ ਹੋਇਆ ਮਾਇਆ ਚ ਅੱਛਾ ਹੁਣ ਦਾ ਫੜੀਏ ਕਿ ਨਾਨਕ ਜਾਣ ਨਾ ਹੋ ਨਾਮ ਹੈ ਜੂਨੀ ਪਾਣ ਆ ਜਾ ਹਾਂ ਮਾਇਆ ਰਹਿੰਦੀ ਤੇ ਫਿਰ ਜੂਨੀ ਕਿਵੇਂ ਫਿਰ ਨਹੀਂ ਪੈਂਦਾ ਜੂਨੀ ਮਾਇਆ ਜੂਨੀ ਪਾਉਂਦੀ ਹੈ ਠੀਕ ਹੈ ਜੀ ਫੜੀ ਪੜੀਏ ਨਾਮ ਸਲਾਹਾ ਹੋਰ ਬੁੱਧੀ ਮਿੱਥਿਆਾਂ बिन सच्चे ਵਾਪਾਰ ਜਨਮ बिरथियां पढ़िए राम सला नाम जेड़ा पढ़ना है असल दे विच ओ ਨਾਮ सला जेड़ी पढ़नी है एही नाम पढ़ना नाम सला लिख देताना जेड़ी सिर्फता है जेड़े गुण पढ़ने ने एही तो पढ़ पढ़िए नाम नाम ना पढ़िए कल भी आया सी मेरा ख्याल परसों आ दुई बार फेर आ गया पढ़िए नाम थे बाकी जेड़ी बुद्धि ਸੰਸਾਰ ਜਿਹੜੀਆਂ ਹੋਰ ਪੜਾਈਆਂ ਨੇ ਸਭ ਮਿੱਥਿਆ ਨੇ ਹਾਂਜੀ ਉਹ ਆਏ ਸੀ ਇੰਨਾ ਪੜਿਆ ਨਾਉ ਇੱਥੇ ਪੜੀਏ ਨਾਮ ਸਲਾਹ ਠੀਕ ਹੈ ਜੀ ਪੜੀਏ ਨਾਮ ਸਲਾਹ ਹੋਰ ਬੁੱਧੀ ਮਿੱਥਿਆ ਬਾਕੀ ਜੋ ਕੁਝ ਬੁੱਧੀ ਪੜਦੀਆਂ ਮਿੱਥਿਆ ਉਹ ਜਲ ਜਾਂਦੀ ਹੈ ਸਭੇ ਬੁੱਧੀ ਜਾਲੀਆਂ ਨੇ ਕਰਹਿ ਤਤ ਗਿਆਨ ਉਹ ਨਹੀਂ ਰਹਿੰਦਾ ਇਹਦੇ ਕੋਲ ਨਾਮ ਪੜਿਆ ਹੋਇਆ ਕੋਲ ਰਹਿੰਦਾ ਇਹ ਪਿੰਨ ਸੱਚੇ ਵਪਾਰ ਜਨਮ ਵਿਰਥੇ ਸੱਚ ਦੇ ਵਪਾਰ ਬਿਨਾਂ ਚਾਨੂੰ ਵਿਰਥਾ ਬਾਕੀ ਬਾਕੀ ਸਭ ਕੋ ਵਿਰਥਾ ਅੰਤਨ ਪਰਾਰ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿੰਨ ਸੱਚ ਨਾ ਪਾਇਆ ਅੰਤਨ ਪਰਾਰ ਵਾਰ ਨਾ ਅੰਤਨ ਨ ਪਲਬਨਾ ਦੀਨੋ ਨਾ ਕਿਸੇ ਨੇ ਪਾਇਆ ਨਾ ਆਪ ਦਾ ਕਹਿੰਦੇ ਨੇ ਅੰਤਨ ਪਰਾਰ ਵਾਰ ਉਹ ਮੈਂ ਨਹੀਂ ਕਹਿੰਦਾ ਕਿਸੇ ਨੇ ਵੀ ਨਹੀਂ ਪਾਇਆ ਜਦ ਤੱਕ ਉਹ ਅੰਤਨ ਪਰਾਰ ਵਾਰ ਸਭ ਸਾਰੇ ਇਹੀ ਗੱਲ ਕਹਿੰਦੇ ਨੇ ਸਭ ਜਗ ਗਰਭ ਗੁਵਾਰ ਅਸਲ ਸਾਰ ਗਰਭ ਗਰਬ ਗੁਵਾਰ ਚ ਫਸਿਆ ਹੋਇਆ ਹੰਕਾਰ ਦੀ ਅਗਿਆਨਤਾ ਹੰਕਾਰ ਕਰਕੇ ਅਗਿਆਨਤਾ ਚ ਫਸਿਆ ਗੁਵਾਰ ਅਗਿਆਨਤਾ ਹੈ ਗਰਬ ਹੰਕਾਰ ਫੁਕਾਰੀ ਹੈ ਅਗਿਆਨਤਾ ਬਸ ਕੁਝ ਕੁ ਕਿਤਾਬਾਂ ਬ੍ਰੰਥ ਲਿਖ ਲਈ ਮਾਰੀ ਜਾਂਦੇ ਨੇ ਇਹ ਕਥਨ ਕਰੀ ਜਾਂਦੇ ਨੇ ਗਰਬ ਗੁਵਾਰ ਤਿੰਨ ਸੱਚ ਨਾ ਪਾਇਆ ਇਹ ਸੰਸਾਰ ਨੂੰ ਤਾਂ ਸੱਚ ਜਨਾ ਹੀ ਨਹੀਂ ਲੱਗਦਾ ਸੱਚ ਤਾਂ ਇਹਨਾਂ ਨੂੰ ਫਿੱਟੇ ਨਹੀਂ ਉਹਦਾ ਤਾਂ ਹੀ ਤਾਂ ਆਪਾਂ ਨਹੀਂ ਬਾਲ ਨਿਕਲਦੇ ਕਮਰੇ ਤੇ ਮੈਂ ਕੱਪੜੇ ਪਾਉਣਾ ਹਾਂਜੀ ਚੱਲੇ ਨਾਮ ਵਿਸਾਰ ਤਾਵਣ ਤਤਿਆਂ ਬਲਦੀ ਅੰਦਰ ਤੇਲ ਦੁਬਦਾ ਕਰਤਿਆਂ ਜਿਹੜੇ ਨਾਮ ਨੂੰ ਵਿਸਾਰ ਕੇ ਚਲੇ ਜਾਂਦੇ ਨੇ ਲੋਭ ਤਾਂ ਪਹਿਲਾਂ ਹੀ ਵਿਸੜਿਆ ਸੱਚ ਤਾਂ ਪਹਿਲਾਂ ਹੀ ਵਿਸੜਿਆ ਤਾਵਣ ਤਤਿਆਂ ਅਹੰਕਾਰ 'ਚ ਮਰ ਜਾਂਦੇ ਨੇ ਤੌਜੇ ਮਰ ਜਾਂਦੇ ਨੇ ਤਾਵਣ ਤਤਿਆਂ ਹੋਰ ਗਾਂ ਅੱਗ 'ਚ ਪਾਏ ਜਾਂਦੇ ਨੇ ਜਿਹੜੇ ਅਹੰਕਾਰੀ ਹੁੰਦੇ ਨੇ ਗਾਂ ਅਕਮ ਸਾਧਰਜੇ ਪਾਏ ਜਾਂਦੇ ਨੇ ਦੁਬਾਰਾ ਤਾਵਣ ਤਤਿਆਂ ਹੋਰ ਹੋਰੋਂ ਨਾਉ ਤਾਉ ਦਿੱਤਾ ਜਾਂਦਾ ਹੈ ਬਲਦੀ ਅੰਦਰ ਤੇਲ ਡੁੱਬਦਾ ਘਟਿਆ ਜਿਹੜੀ ਪਹਿਲਾਂ ਹੀ ਜਲਦੀ ਸੀ ਤ੍ਰਿਸ਼ਨਾ ਦੀ ਅੱਗ ਡੁੱਬਦਾ ਉਹ ਚ ਹੋਰ ਤੇਲ ਪੁੱਲਦੀ ਹੈ ਜਿਹੜੀ ਡੁੱਬਦਾ ਨਾ ਦੋ ਪਾਸੇ ਦੀ ਦੌੜ ਉਹ ਬਲਦੀ ਅੰਦਰ ਤੇਲ ਹੀ ਹੈ ਸਮਝੋ ਬਲਦੀ ਅੰਦਰ ਤੇਲ ਡੁੱਬਦਾ ਘਟਿਆ ਬਲਦੀ ਆਪੇ ਬੁੱਝਵੇਂ ਜਾਂ ਡੁੱਬਦਾ ਨਾ ਰਹੇ ਜੇ ਗਾਹਾਂ ਨੂੰ ਛੱਡਦੀ ਹੈ ਨਾ ਡੁੱਬਦਾ ਛੱਡਦੀ ਹੈ ਤੇ ਅੱਗ ਇੱਕ ਗੱਲ ਤੇ ਆ ਜੀ ਚੱਲੀਏ ਆਪੇ ਬੁਝ ਬਝ ਜਾਂਦੀ ਏ ਪਿਛਲੇ ਕੋਲੇ ਕਾਲੇ ਆਪੇ ਸਵਾ ਹੋ ਕੇ ਰਹਿ ਜਾਣਗੇ ਠੀਕ ਹੈ ਜੀ ਹਾਂ ਜੀ ਖੇਲ ਫਿਰੇ ਵੱਤਿਆਂ ਨਾਮ ਇੱਕ ਮੇਲ ਸੱਚੇ ਰਤਿਆਂ ਆਇਆ ਉੱਠੀ ਖੇਲ ਆਇਆ ਜਨਮ ਲੈ ਲਿਆ ਉੱਠ ਕੇ ਫਿਰ ਖੇਡਣ ਲੱਗ ਗਿਆ ਬੜਾ ਹੋ ਕੇ ਕਰੇ ਉਹ ਵੱਤਿਆਂ ਉਹ ਆਪ ਮਹਾਰਾਜ ਫਿਰਦਾ ਵੂ ਜੋਰ ਘੋੜੇ ਬੰਨ੍ਹ ਜਿੱਦੂ ਮਰਜੀ ਤੁਰ ਪੈਂਦਾ ਆਪਣੀ ਮਰਜ਼ੀ ਨਾਲ ਚੱਲਦਾ ਹੈ ਆਪਣੀ ਮਰਜ਼ੀ ਨਾਲ ਚੱਲਦਾ ਜੋ ਆਪਣੀ ਮਰਜ਼ੀ ਹੈ ਜੋ ਮਨ ਭਾਉਂਦਾ ਉਹ ਕੰਮ ਕਰਦਾ ਜੋ ਮਨ ਭਾਉਂਦਾ ਹੈ ਉਹ ਬੋਲਦਾ ਹੈ। ਨਾਨਕ ਸੱਚੇ ਮੇਲ ਸੱਚੇ ਰੱਤੇ। ਸੱਚੇ ਦੇ ਨਾਲ ਮੇਲ ਤਾਂ ਸੱਚ ਦਾ ਰੰਗ ਜਿਹੜੇ ਤੇ ਹੋਊਗਾ। ਮਾਇਆ ਦੇ ਨਾਲ ਫਿਰਦਾ ਮਾਇਆ ਨਾਲ ਖੇਡਦਾ ਮਾਇਆ ਦੇ ਵਿਚ ਰਚੇ ਹੋਇਆ। ਮਾਇਆ ਦੇ ਵਿਚ ਰਚੇ-ਮਿਚੇ ਹੋਇਆ ਮਰ ਜਾਂਦਾ ਮਾਇਆ ਦੇ ਅਗਰ ਮਸਾ ਕਰਕੇ ਫੇਰ પાਜਤਾ ਜਾਂਦਾ ਜੇ ਸੱਚ ਨਾਲ ਕਿਸੇ ਨੂੰ ਜੋੜਨਾ ਹੋਵੇ ਨਾਮ ਦਾ ਸੱਚਾ ਮੇਲ ਸੱਚੇ ਰਤਿਆਂ ਸੱਚ ਦਾ ਰੰਗ ਚੱਲ ਜਵੇ ਤਾਂ ਸੱਚੇ ਚ ਸਮਾ ਜਾਂਦਾ ਹੈ ਠੀਕ ਹੈ ਨਾਮ ਇੱਕ ਸੱਚਾ ਮੇਲ ਸੱਚੇ ਰਤਿਆਂ ਇੱਥੇ 24ਵੀਂ ਪੌੜੀ ਸਮਾਪਤੀ ਹੈ ਜੀ